ਲੋਕ ਮਹੱਲਾ ਪੰਜਵਾਂ ਜੀਵਦਿਆਂ ਨਾ ਚੇਤਿਓ ਮੂਵਾਂ ਰਲੰਦੜੋਂ ਖਾਕ ਬਾਨਕ ਦੁਨੀਆ ਸੰਗੀ ਗੁਦਾਰਿਆ ਸਾਖਤ ਮੂੜ ਮਿਪਾਕ ਕਾਲ ਨੂੰ ਲੱਗੇ ਅਗ ਹਾਂਜੀ ਜੇ ਜਿੰਨਾ ਚਿਤ ਜਉਂਦਾ ਮੈਨੂੰ ਜਾਗਿਆ ਨਾ ਤਾਂ ਵਿੱਚੇ ਖਾਕ ਰਲ ਜਾਣਾ ਵਿੱਚੇ ਜਲਦੂਆ ਕਰਦੇ ਜੇ ਜਾਗ ਗਿਆ ਤੇ ਕੇ ਬਾਣ ਦਿਨ ਨਹੀਂ ਉਹ ਕਰ ਪਿਆ ਦੇ ਵੀ ਤਾਂ ਮਰ ਜਾਣਾ ਵਿੱਚ ਰਲ ਜਾਂਦਾ ਖਾਕ ਦੇ ਆ ਸਰੀਰ ਦੇ ਵਿੱਚੇ ਰਲ ਜਾਂਦਾ ਕਬਰਾਂ ਕਾਦੇ ਬਣਾਈਆਂ ਹੋਈਆਂ ਨੇ ਸਮਾਦੀਆਂ ਕਾਦੇ ਬਣਾਈਆਂ ਹੋਈਆਂ ਨੇ ਉਹ ਹੋਇਆ ਇਹ ਖਾਕ ਉਹੀ ਬੈਠਾ ਉਹ ਤਾਂ ਵੀ ਬਠੇ ਟੇਕਦੇ ਉੱਥੇ ਨੂੰ ਇਹ ਖਾਕ ਦੇ ਰਲੇ ਨੇ ਇਹ ਵੀ ਨੂੰ ਸਾਡੇ ਆਈਦੇ ਨੇ ਨਹੀਂ ਉਹਨੂੰ ਟੇਕਦੇ ਟੇਕਦੇ ਨੇ ਖਾਕ ਇਟਾਂ ਨੂੰ ਦੇਖਦੇ ਇਟਾਂ ਦਾ ਮੁੱਲ ਹੁੰਦੀ ਮਾਇਆ ਗਿਆ ਮਾਇਆ ਜੇ ਗਿਆ ਫੇਰ ਦੂਆ ਜਨ ਮਿਲ ਜੂ ਦੂਆ ਜਨ ਮਿਲਣਾ ਖਾਅ ਕੇ ਰਲਣਾ ਹੀ ਆ ਅਸਲ ਵਿੱਚ ਦੂਸਰਾ ਜਨ ਜਾਂ ਮਿਲਣਾ ਫੇਰ ਖਾਅ ਕੇ ਰਲ ਜੂ ਹਾਂਜੀ ਨਾਨਕ ਦੁਨੀਆ ਸੰਗੀ ਗੁਦਾਰਿਆ ਸਾਕਤ ਮੂੜ ਮਪਾਕ ਸਾਰਾ ਜੀਵਨ ਦੁਨੀਆਂ ਦੇ ਨਾਲ ਗੁਜ਼ਾਰਤਾ ਗੁਜ਼ਾਰਿਆ ਦਾ ਗੁਜ਼ਾਰਤਾ ਸਾਕਤ ਮੂੜ ਮਪਾਕ ਸਾਕਤ ਹੋਰ ਖੁਸੀ ਇਸ ਦੇ ਵਿੱਚ ਸਾਕਤ ਕਦੇ ਵੀ ਅਕਲਮੰਦ ਨਹੀਂ ਹੁੰਦਾ ਜਿਹੜੇ ਗੁਰਮਤ ਦਾ ਵਿਰੋਧ ਕਰਦੇ ਨੇ ਪਹਿਲਲ ਬੱਤਾਂ ਨਹੀਂ ਖੜੇ ਦੇਣਾ ਗੁਰਮਤ ਦੇ ਪਹਿਲਲ ਗੁਰਮਤ ਨੂੰ ਛੱਡ ਕੇ ਜਿਹੜੀਆਂ ਬੱਤਾਂ ਤੇ ਪ੍ਰਚਾਰ ਕਰਨ ਸਿੱਖ ਵੀ ਸਾਖਤ ਨੇ ਜਿਹੜੇ ਗੁਰਮਤਿ ਨੂੰ ਸਹੀ ਦੀ ਪ੍ਰਚਾਰ ਕਰਦੇ ਸਾਰੇ ਸਾਖਤ ਨੇ ਆਜ ਸਾਰੇ ਸਿੱਖ ਜਿਹੜੇ ਪ્યોਰ ਗੁਰਮਤਿ ਦਾ ਪ੍ਰਚਾਰ ਵੀ ਕਰਦੇ ਸਾਖਤ ਨੇ ਮੂਲ ਨੂੰ ਮੂਲ ਗ੍ਰਹਿ ਨਾ ਪਾਖਦੇ ਛੁੱਧ ਨਹੀਂ ਹਿਰਦਾ ਕਿਸੇ ਦਾ ਵੀ ਜੇ ਹਿਰਦਾ ਸ਼ੁੱਧ ਹੋਵੇ ਤਦ ਤਨਖਾਲੀ ਨਹੀਂ ਰਹਿ ਸਕਦਾ ਗੁਰੂ ਤੋਂ ਗੁਰੂ ਨੇ ਕਹਤਾ ਸੀ ਯਾਰ ਜਿਹਨੇ ਤਨਖਾਲ ਨਹੀਂ ਉਹ ਸਿੱਖੀ ਨਹੀਂ ਮਿਲਲੀ ਅਜਿਉਂ ਸਾਹਬ ਨੂੰ ਜਦ ਗਏ ਘੋੜੇ ਦੀ ਬਾਗ ਖੜੀ ਇਹਨਾਂ ਨੇ ਵਾਲਵੇ ਜੀ ਵੀ ਜਾਣ ਨਹੀਂ ਦੇਣਾ ਪਹਿਲਾਂ ਤਨਖਾਹ ਦੇ ਕੇ ਜਾਓ ਉਹ ਕਹਿੰਦੇ ਤਨਖਾਹ ਅਮੁੱਲ ਸਭ ਦੀ ਢਾਲਾਂ ਪਰ ਪਰ ਕੇ ਮੋਹਰਾਂ ਨਹੀਂ ਬੰਦੀਆਂ ਨੇ ਗੜਕੈ ਨਹੀਂ ਦਿੱਤੇ ਪੈਸੇ ਪਰ ਇਹ ਕਹੇਤਾ ਸੀ ਵੀ ਜੀ ਨੇ ਤਨਖਾਹ ਵਾਲੀ ਇੱਕ ਪਾਸੇ ਹੋ ਜੋ ਜਿਹਦੇ ਸਿੱਖੀ ਲੈਣੀ ਇੱਕ ਪਾਸੇ ਭਾਈ ਤਾਂ ਅੱਗੋਂ ਪੰਜ ਪਿਆਰੇ ਹੋਰ ਸੀ ਜਿਹੜੇ ਸਿੰਘ ਉੱਥੇ ਰਹੇ ਜਿਹੜੇ ਬਾਅਦ ਚ ਜਿਹੜਾ ਇਹ ਆਲਾਦ ਹੈ ਇੱਕ ਪਾਸੇ ਹੋ ਗਿਆ ਇਹਨਾਂ ਦਾ ਅਸੀਂ ਸਿੱਖੀ ਲੈਣੀ ਸੀ ਤਨਖਾਹ ਦੀ ਲੈਣੀ ਅਸੀਂ ਗੁਰੂ ਕੇ ਨਾਲ ਜਿੰਨਾ ਤਾਂ ਤਨਖਾਹ ਤਾਂ ਨਾਲ ਅੱਜ ਜਿਹੜੇ ਤਨਖਾਹ ਲੈ ਰਹੇ ਨੇ ਗੁਰਦੁਆਰਿਆਂ ਤੋਂ ਕਿਸ ਵੇਸ ਤੇ ਕਹਿ ਰਹੇ ਨੇ ਅਸੀਂ ਸੇਖੋ ਜਿਨ੍ਹਾਂ ਦੀਆਂ ਗੱਡੀਆਂ ਤੇ ਪٹرول ਗੋਲਕ ਤੋਂ ਚੱਲਦੇ ਨੇ ਕਿਸ ਵੇਸ ਤੇ ਕਹਿ ਰਹੇ ਨੇ ਅਸੀਂ ਸੇਖੋ ਸਾਡੇ ਕੋਲ ਸਾਖੀਆਂ ਪਈਆਂ ਨੇ ਉਸ ਸਾਖੀਆਂ ਨੂੰ ਹੀ ਬੋਲ ਲੈਣ। ਸਾਖੀਆਂ ਦਾ ਦਾ ਪ੍ਰਚਾਰ ਕਰਦੇ ਉਹ ਸੀ। ਜਿੰਨੇ ਨੇ ਤੁਹਾਡੇ ਤਨਖਾਹਾਂ ਦੇ। ਕੋਲਕਤੋਂ ਗੁਰੂ ਤੋਂ ਤਨਖਾਹ ਲੈ ਰਹੇ ਹੋ। ਕਿਸ ਵੇਸ ਤੇ ਕਹਿ ਰਹੇ ਹਾਂ ਅਸੀਂ ਸਿੱਖਾਂ। ਜਿਹੜਾ ਤਨਖਾਹ ਲਊਗਾ ਸਿੱਖ ਨਹੀਂ। ਘਰ ਦਾ ਮਾਲਕ ਨਹੀਂ। ਸਿੱਖ ਤਾਂ ਉਹ ਐ ਜਿਹੜਾ ਗੁਰੂ ਦਾ ਪਿਆਰਾ ਪੰਜ ਪਿਆਰੇ। ਨਾਲ ਦਾ ਹੁੰਦਾ। ਸਿੱਖ ਤਾਂ ਪੁੱਤ ਹੁੰਦਾ। ਉਹ ਤੋਹ ਦੇ ਸਿੱਖਾਂ ਪੁੱਤਾਂ ਭਾਇਆ ਉਥੇ ਤਨਖਾਹ ਇਦਾਂ ਹੁੰਦਾ ਜੇ ਤਨਖਾਹ ਇਦਾਂ ਉਹ ਘਰ ਵੀ ਇਦਾਂ ਹੁੰਦਾ ਸੀ ਬਕਰਾਂ ਹੁੰਦਾ ਠੀਕ ਹੈ ਜੀ ਆਪਰੇ ਤੇ ਨਾ ਨੂੰ ਕੋ ਮਿਲਦਾ ਹੁੰਦਾ ਨਾਨਕ ਦੁਨੀਆ ਸੰਗੀ ਗੁਜ਼ਾਰੇ ਆ ਨਪਾਕ ਸਾਖਤ ਮੂੜ ਸਿੱਖ ਸਾਖਤ ਸੰਗ ਜੁੜੇ ਹੋਏ ਨੇ ਉਹੀ ਸਾਸਤ ਉਹ ਖੇਡਦੇ ਨੇ ਉਹੀ ਦੁਨੀਆਂ ਖੇਡਦੀ ਹੈ ਉਸੇ ਦੀ ਦੌੜ 'ਚ ਉਹ ਪਏ ਹੋਏ ਨੇ ਮਾਇਆ ਦੀ ਦੌੜ 'ਚ ਜਿਹੜੀ ਦੁਨੀਆਂ ਦੀ ਦੌੜ ਤੋਂ ਨਾਲ ਸਿੱਖ ਦੀ ਕੋਈ ਸੰਬੰਧ ਨਹੀਂ ਹੈ ਜਿੱਦੀ ਦੁਨੀਆਂ ਨਾਲ ਸੰਬੰਧ ਸਿੱਖ ਨਹੀਂ ਹੈ ਇਹ ਪੰਕਤੀ ਦਾ ਸਾਫ਼ ਅਰਥ ਹੈ ਸਾਫ਼ ਇਸ਼ਾਰਾ ਬੰਕਤੀ ਇਹ ਕਰਦੀ ਹੈ ਸੰਗ ਰੁਝਾਇਆ ਉੜ ਨਾ ਪਾਕ ਫਿਰਦਾ ਪਾਕ ਨਹੀਂ ਹੈ ਫਿਰਦਾ ਸ਼ੁੱਧ ਬਲੀਨ ਹੈ ਸਿੱਖੀ ਦੇ ਅੰਦਰ ਫਿਰ ਜੇ ਖਾਂਸੀ ਸਿੱਖ ਨਹੀਂ ਹੋ ਜਾਣਾ ਹੈ ਅਦਾਲਤਾਂ ਦੇ ਵੀ ਸਾਬਤ ਹੋ ਜਾਣਾ ਹੈ ਕੋਰਟਾਂ ਦੇ ਸਾਬਤ ਹੋ ਜਾਣਾ ਹੈ ਸੁਪਰੀਮ ਕੋਰਟ ਨਾਲ ਲੈ ਗਏ ਸਿੱਖੀ ਇਹ ਤਾਂ ਜੋ ਸ਼ੁਰੂ ਹੋਈ ਹੈ ਗੱਲ ਸਿੱਖ ਕੌਣ ਹੈ ਕੌਣ ਨਹੀਂ ਹੈ ਇਹਦਾ ਫੈਸਲਾ ਸੁਪਰੀਮ ਕੋਰਟ ਕਰੂ ਕਿਉਂਕਿ ਗੁਰਦੁਆਰਾ ਕੀਤਾ ਸੀ ਬਣਾ ਲਿਆ ਕਾਨੂੰਨ ਦੇ ਰਾਹ ਤਾਂ ਗਿਆ ਪਿਆਗੇ ਗੁਸਾਰਾ ਨੇ ਝਗੜੇ ਤੇ ਸਾਡੇ ਚੱਲਦੇ ਨੇ ਅਦਾਲਤਾਂ ਨੇ ਵੀ ਤਾਂ ਸਾਡਾ ਤੱਕ ਗਿਆ ਹੋਇਆ ਦਾ ਹਰ ਫੈਸਲਾ ਅਦਾਲਤ ਕਰ ਸਕਦੀ ਹੈ ਦੇ ਫੈਸਲਾ ਦੇਣ ਲਈ ਹੁੰਦਾ ਹੈ ਝੂਠ ਕੀ ਹੈ ਉਧਰ ਫੈਸਲਾ ਹੋ ਜੂ ਲੈਣ ਵਾਲੇ ਸਿੱਖ ਨਹੀਂ ਹਾਂ ਇਆਂ ਰਣਕੇ ਕੋਈ ਬੈਠਦਾ ਸੁਭਾ ਨਾਲ ਰਹੋ ਹਾਂਜੀ ਜੀਵੰਦਿਆਂ ਹਰ ਚੇਤਿਆ ਮਰੰਦਿਆਂ ਹਰ ਰੰਗ ਜਨਮ ਪਦਾਰਥ ਤਾਰਿਆ ਨਾਨਕ ਸਾਧੂ ਸੰਗ ਇਹ ਆ ਗੁਰਮੁਖੀ ਭਗਤੀ ਪਹਿਲੀ ਸੀ ਗੁਰਮੁਖੀ ਭਗਤੀ ਠੀਕ ਹੈ ਆ 10% ਜਿਹੜੇ ਗੁਰਮੁਖ ਨੇ ਉਹਨਾਂ ਦੇ ਹੱਕ ਦੀ ਭਗਤੀ ਹੈ ਜਿਨ੍ਹਾਂ ਨੇ ਜਿਉਂਦਿਆਂ ਨਹੀਂ ਆ ਹਰ ਚਿੱਤਿਆ ਜੀ ਬੰਦੇ ਨੂੰ ਹਰ ਦਾ ਆ ਗਿਆ ਹਰ ਦੇ ਤੇ ਜਗਾਤ ਤੇ ਚਿੱਤ ਚਿੱਤ ਨੂੰ ਕਿਹ ਹਰਤਾ ਜਾਗਦਾ ਹੀ ਹੈ ਹਮੇਸ਼ਾ ਸਤਿਗੁਰੂ ਜਾਗਦਾ ਹੈ ਤੇ ਉਹ ਜੇ ਹਰ ਦੇ ਨਾਲ ਉਹ ਵੀ ਜਾਗ ਪੇ ਦੋਏ ਜਾਗ ਪੇ ਮਰੰਦਿਆਂ ਹਰ ਰੰਗ ਹਰ ਦਾ ਰੰਗ ਜਲੇ ਹੋਊਗਾ ਸਰੀਰ ਛੱਡੂਗਾ ਹਰ ਰੰਗ ਚ ਰੰਗਿਆ ਹੋਇਆ ਹੋਊਗਾ ਸਤਿਗੁਰ ਦਾ ਨਾ ਮਰਦਾ ਉਦੋਂ ਤਾਂ ਰੋੜਾਈ ਦੀ ਜਮਾ ਮਨ ਲੱਗਿਆ ਹੈ ਜੀਵ ਆਤਮਾ ਨਾਲ ਜੀਵਾਤਮਾ ਜਿਹਾ ਜਰੀ ਝੰਡੂ ਹਰਦਾ ਰੰਗ ਜਨਮੀ ਹੋ ਹਰ ਵਰਦਾ ਹੀ ਰੱਬ ਹੋ ਕੋਈ ਗੱਲ ਹੋ ਇਹ ਕਹਿੰਦਾ ਜੇ ਤੁਮ ਮਹਾਰਜ ਬਾਬੀ ਕੋ ਤਾਰਿਆ ਨਾਨਕ ਸਾਧੂ ਸੰਗ ਜਦੋਂ ਪਦਾਰਥ ਮਿਲ ਗਿਆ ਤਰ ਗਿਆ ਗ੍ਰੰਥ ਸਾਧੂ ਸੰਗ ਸਾਧੂ ਦੀ ਸੰਪਰਤ ਵਿੱਚ ਸਾਧੂ ਸੰਗ ਹੈ ਹੁਣ ਨਾ ਸਾਧੂ ਦਾ ਸਾਗਾ ਕੀਤਾ ਹੋਇਆ ਸਾਧੂ ਸੱਗੀ ਹੈ ਠੀਕ ਹੈ ਜਨਪਦਾਰਤ ਚੌਥਾ ਪਦਾਰਤ ਹੈ ਜੀ ਚੌਥਾ ਪਦਾਰਤ ਜੇ ਮਰੇ ਵੰਨਤਾ ਜਨਪਦਾਰਤ ਮਿਲਣਾ ਠੀਕ ਹੈ ਜੀ ਸ਼ਬਦ ਮਰੇ ਤਾਂ ਫਿਰ ਮਰਨ ਹੋਈ ਜਦੋਂ ਮਰਦਾ ਹੈ ਤਾਂ ਜਾਂਦਾ ਇਹਨੂੰ ਫਿਰ ਜਿਹੜਾ ਰਾਮਕਲੀ ਦਾ ਆਗ ਦਾ ਸ਼ਬਦ ਹੈ ਰਾਮ ਨਾਮ ਸਿਮਰ ਤੂੰ ਜਿਵੇਂ ਫਿਰਨਾ ਖਾਈ ਮਹਾਕਾਲ ਇਹ ਹੁਣ ਉਸ ਸਥਿਤੀ ਚ ਹੈ ਪਟ ਗਈ ਗਈ ਹੋਈ ਹੈ ਠੀਕ ਹੈ ਜੀ ਉਹਨਾਂ ਦਾ ਪਤਾ ਹੀ ਨਹੀਂ ਗੱਲ ਦਾ ਵੀ ਗੱਲ ਕੀ ਹੈ ਜਿਉਣ ਨੇ ਹੀ ਤਾਂ ਉਹਦਾ ਸੰਸਾਰੀ ਜਿਉਣ ਵਾਲ ਨੂੰ ਜਿਉਣ ਸਮਝਦੇ ਨੇ ਉਹ ਆਨਾਂ ਦੇ ਅਰਥ ਜਿਹੜੇ ਆਪਸ ਵਿੱਚ ਅੰਤਰ ਉਹ ਨਹੀਂ ਸਮਝਦੇ ਉਹਨਾਂ ਦੀ ਬੁੱਧੀ ਔਰ ਜੜ ਆਪਣੇ ਆਪ ਨੂੰ ਸਰੀਰ ਤੋਂ ਬਾਹਰ ਦੇਖੇ ਦੀ ਸਕਦੇ ਜਿੰਨਾ ਜਰਾ ਤਦ ਦਰਸ਼ੀ ਹੋ ਸਕਦਾ ਉਹ ਨજર ਗੁਰਬਾਣੀ ਨੂੰ ਸਮਝੇ ਨਹੀਂ ਸਕਦਾ ਉਹ ਆਪਣੇ ਆਪ ਨੂੰ ਸਰੀਰ ਦੇ ਬਿਨਾਂ ਉਹ ਸਮਝਦੇ ਹੀ ਕਿ ਅਦਸ਼ਲ ਸਰੀਰ ਦੇ ਬਿਨਾਂ ਤੁਸੀਂ ਕੀ ਸਮਝਾ ਦੇਣ ਠੀਕ ਹੈ ਜੀ ਉਹਦਾ ਮਾਇਆ ਤੇ ਅਟ ਗਿਆ ਜੰਦਾ ਸਰੀਰ ਮਾਇਆ ਪੇ ਅਟਕੀ ਜਾਂਦੀ ਜੇ ਨਾਲੇ 80 ਸਾਲ ਹੋ ਗਏ ਮਾਰਾ ਫੇਰ ਦੇ ਨੂੰ ਫਿਰ ਉਪਦੇਸ਼ ਕੀਤਾ ਬੈਠਾ ਫਿਰ ਮਾਇਆ ਤੇ ਅਟਕਦੀ ਹੈ ਜੇ ਰਹੇ ਨੇ ਉਹਨੂੰ ਪੜ ਰਹੇ ਜਾ ਕੇ ਮਾਗਰ ਫਿਰ ਮਾਇਆ ਤੇ ਅਟਕੀ ਜਾਂਦਾ ਜਾ ਕੇ ਇਹ ਡਟ ਕੇ ਮਾਇਆ ਤੇ ਨੀ ਇਹਦਾ ਦੋਆ ਨੋ ਨੀ ਮਾਇਆ ਤੋਂ ਕਹਾਂ ਜਾਣ ਦਿੰਦੇ ਮਾਇਆ ਤੋਂ ਵੀ ਕਹਾਂ ਜਾਣ ਦਿੰਦੇ ਹੋਈ ਪੌੜੀ ਆਦ ਜੁਗਾਦੀ ਆਪ ਰੱਖਣ ਵਾਲਿਆ ਅਤ ਨਾਮ ਕਰਤਾਰ ਸੱਚ ਪਸਾਰਿਆ ਆਪ ਰੱਖਣ ਵਾਲਾ ਆਜੂਗਾ ਤੋਂ ਰੱਖਿਆ ਕਰਨ ਵਾਲਾ ਪਰਮੇਸ਼ਰ ਦੀ ਗੱਲ ਹੋ ਰਹੀ ਹੈ ਜੀ ਹਾਂ ਅੱਛਾ ਜੀ ਰੱਖਿਆ ਕਰਨ ਵਾਲਿਆ ਆਜੂਗਾ ਤੋਂ ਕਹਿੰਦਾ ਮਾਇਆ ਜਬੀ ਬਦੀ ਮਾਰਿਆ ਕੋਈ ਬਦੀ ਆਦੋ ਲੱਗタル ਨਹੀਂ ਨੋ ਸਮਾਇਆ ਨਾ ਜੋੜ ਦਿੰਦਾ ਮਰਿਆ ਤਾਂ ਨੂੰ ਨਹੀਂ ਜੰਮਣ ਬੰਦਾ ਤਾਂ ਲੋਕਾਂ ਨੂੰ ਪਰਵੇਸ਼ੀ ਰੱਖਣ ਹਾਰਿਆ ਸਤਿਨਾਮ ਕਰਤਾਰ ਸੱਚ ਪਸਾਰਿਆ ਸਤਿਨਾਮ ਕਰਤਾਰ ਕਰਤਾਰ ਦਾ ਨਾਮ ਕੀ ਆ ਸੱਚ ਹੈ ਉਹਦਾ ਗਿਆਨ ਸੱਚ ਹੈ ਉਸੇ ਗਿਆਨ ਦਾ ਪਸਾਰਿਆ ਸਾਰਾ ਸੰਸਾਰ ਸੱਚ ਪਸਾਰਿਆ ਸੱਚੇ ਪਸਾਰੇ ਆ ਕੋਈ ਪਸਾਰਾ ਇਹਦਾ ਬजूद ਹੈ ਆਵੇਂ ਨਹੀਂ ਪਰਮ ਵੀ ਦੁਨੀਆ ਹੈ ਉਹਦੀ ਦੁਨੀਆ ਹੈ ਸਾਰਾ ਪਸਾਰਾ ਸੱਚਾ ਹੈ ਜੂੜਦਾ ਪਸਾਰਾ ਨਹੀਂ ਹੈ ਇਹ ਸੱਚਾ ਪਸਾਰਾ ਹੈ ਜੂੜਦਾ ਪਸਾਰਾ ਕੀ ਹੁੰਦਾ ਹੈ ਜੂੜਦਾ ਪਸਾਰਾ ਕੀ ਹੁੰਦਾ ਹੈ ਜਿਹੜਾ ਸਾਨੂੰ ਰਾਤ ਨੂੰ ਸੁਪਨਾ ਆਉਂਦਾ ਆ ਜੈਨੋ ਜੂੜਦਾ ਪਸਾਰਾ ਹੁੰਦਾ ਕਹਾਂ ਜੋ ਨਾ ਠੀਕ ਹੈ ਜੀ ਮਾਨ ਝੂਠਾ ਝੂਠੇ ਦਾ ਸੁਪਨਾ ਝੂਠਾ ਸੱਚੇ ਦਾ ਸੁਪਨਾ ਸੱਚਾ ਸੱਚੇ ਦਾ ਪਸਾਰਾ ਸੱਚਾ ਝੂਠੇ ਦਾ ਪਸਾਰਾ ਝੂਠਾ ਇੱਕ ਦਾ ਅਨਾਦੀ ਇਹ ਕੀ ਫਰਕ ਹੈ ਨਾ ਆਪਸ ਇਹਦਾ ਜੀ ਜੋਤ ਹੈ ਅਨਾਦੀ ਜੁਗਾਦੀ ਸ਼ਬਦ ਹੈ ਹੁਕਮ ਅੱਛਾ ਜੀ ਜਦੋਂ ਤਾਂ ਹੁਕਮ ਚੱਲਿਆ ਜਦ ਤੋ ਰੱਖਿਆ ਕਰ ਰਹੇ ਆ ਜੁਗਾਦੀ ਆਪ ਰੱਖਣ ਵਾਲਿਆ ਜੁਗਾਦੀ ਦਾ ਹੁਕਮ ਹੈ ਇਹ ਜਿੱਨਾ ਜਦੋਂ ਹਗਮਨੇ ਪੈਦਾ ਹੋਇਆ ਸੰਸਾਰੇ ਨਹੀਂ ਪੈਦਾ ਹੋਇਆ ਜੁਗੈ ਨਹੀਂ ਪੈਦਾ ਹੋਇਆ ਸਮਾਏ ਨਹੀਂ ਪੈਦਾ ਹੋਇਆ ਇਹ ਤਾਂ ਜੋਤ ਨਾਲ ਪੈਦਾ ਹੋ ਅਨਾਦੀ ਆਦ ਨਾ ਹੋਵੇ ਜੋਤ ਆਦ ਨਹੀਂ ਹੈ ਸ਼ਬਦ ਆਦ ਹੈ ਸ਼ਬਦ ਪ੍ਰਗਟ ਕੋ ਉਤੋਂ ਹੁੰਦਾ ਜਦੋਂ ਪ੍ਰਗਟ ਹੁੰਦਾ ਫਿਰ ਜੁਗਾਲ ਸ਼ੁਰੂ ਹੋ ਜਾਂਦਾ ਤੇ ਜੋ ਸ਼ੁਰੂ ਹੋ ਜਾਂਦਾ ਤਾਂ ਡੁੱਬਣਾ ਚਾਹੀਦਾ ਸੱਚੇ ਤੋਂ ਪਰਵਾਹ ਪਿਆ ਮਾਇਆ ਨਾਲ ਸਮਾਨਾ ਆ ਉਹ ਸਮੇ ਆਦ ਦਾ ਸਮਾਂ ਉਹ ਹੈ ਜੀ। ਆਦ ਨਹੀਂ ਹੈ ਉਹ। ਉਹ ਸਮਾ ਦਾ ਸਤਿਯੁਗ ਦਾ ਸਮਾਂ। ਆਦੋ ਪਲਦਾ ਨੂੰ ਜਦੋਂ 60 ਪੈਗਾ ਦਿੱਤੀ। ਅੱਛਾ ਜੀ। ਪਲ ਹੈ। ਆਦ ਅੰਤ ਦੀ ਹਰਦਾ ਇੱਕ ਪਲ ਪਲ ਦੀ ਹੈ ਬਚਾਇਤਾ ਆਦ ਅੰਤ ਮੱਦ ਥੱਲੇ ਸੀ ਨਾ ਹੈ ਮੰਨ ਨਹੀਂ ਉਮਰ ਹੈ ਜਿੰਨੀ ਹੈ ਦੇਖੋ 200 ਦੇ ਲਾਠੀ ਦੇ ਹਾਂਜੀ ਇਹ ਕਿਸੇ ਆਦ ਹੈ ਇੱਕ ਕਿਸੇ ਦਾ ਅੰਤ ਹੈ ਦੂਜੇ ਪਾਸੇ ਕੋਤਲਾ ਇੱਕ ਥੱਲੇ ਦਾ ਲਾਠੀ ਵਿਚਾਲੇ ਵਿਚਾਲੇ ਹੀ ਹੈ ਤੇ ਉਹ ਮੱਦ ਲਾਠੀ ਆਉਂ ਠੀਕ ਹੈ ਅਨਾਦ ਕਿਵੇਂ ਫਿਰ ਦੱਸਾਂਗੇ ਆਪਾਂ ਅਨਾਦ ਜੋਤ ਹੈ ਜੀਦਾ ਆਦ ਹੈ ਨਹੀਂ ਗਦੇ ਜੀਦਾ ਜਨਮ ਨਹੀਂ ਸਾਬਤ ਹੁੰਦਾ ਕਰ ਸਕਦੇ ਉਹ ਅਨਾਦ ਹੈ ਅੱਛਾ ਜੀ ਜੀਦਾ ਆਦ ਸਾਬਤ ਨਹੀਂ ਹੁੰਦਾ ਉਹ ਅਨਾਦ ਹੈ ਠੀਕ ਹੈ ਆਦ ਅਨਾਦ ਅਨਾਹ ਚੁਬ ਚੁਬ ਇੱਕੋ ਬੇਸ ਜੀਦਾ ਨਾ ਸਾਬਤ ਕਰਦੇ ਜੋਤ ਹੈਦਾ ਆਦ ਨਹੀਂ ਸਾਬਤ ਹੁੰਦਾ ਅੱਛਾ ਜੀ ਸ਼ਬਦ ਆਦ ਸਾਬਤ ਹੁੰਦਾ ਠੀਕ ਹੈ ਤਾਂ ਹੀ ਸੱਚ ਲਿਖਿਆ ਦਾ ਆਦ ਸਾਬਤ ਹੁੰਦਾ ਠੀਕ ਹੈ ਜੀ ਆਯਾ ਦਾ ਹਾਲਤ ਵੀ ਸਾਬਤ ਹੁੰਦਾ ਸ਼ਬਦ ਦਾ ਅੰਤ ਨਹੀਂ ਹੁੰਦਾ ਸ਼ਬਦ ਗੁਪਤ ਹੁੰਦਾ ਠੀਕ ਹੈ ਜੀ ਹਾਂ ਇਹਦਾ ਪਤਾ ਲੱਗਦਾ ਜੋ ਤਾਂ ਹੈ ਜੀ ਉਹ ਆਨਾਦ ਠੀਕ ਹੈ ਜੀ ਨੇ ਸ਼ਬਦ ਰੂਪ 따ਲ ਗੱਲਿਆ ਜੁਗਾਦ ਹੋਗੀ ਆਦਮੀ ਆ ਫਿਰ ਜੋ ਆਦਮੀ ਇਹ ਸ਼ਬਦ ਦਾ ਆਨ ਹੈ ਸ਼ਬਦ ਦਾ ਜੁਗਾਦ ਆ ਜੁਗਾਦ ਦੋਏ ਆਪੇ ਜੋਤੇ ਹੋਗੀ ਸ਼ਬਦ ਦਾ ਆਨ ਹੈ ਸ਼ਬਦ ਫਾਇਦਾ ਕੀਤਾ ਸ਼ਬਦ ਸੰਸਾਰ ਦਾ ਹੈ ਆ ਜੁਗਾਦ ਦੋਏ ਹੋਗੇ ਜੋਤ ਨਾਲ ਦੋਏ ਉਹਨਾ ਕਹੀਂ ਨਾ ਹੋਏ ਕੱਟੇ-ਕੱਟ ਸਾਰੇ ਆ ਉਹਨਾ ਗਏ ਨਾ ਹੋਏ ਕੱਟੇ-ਕੱਟ ਸਾਰੇ ਆ ਕبھی ਨਹੀਂ ਉਡੀ ਕਿਤੇ ਕਿਤੇ ਵੀ ਕਿਸੇ ਪਰ ਨਾਲ ਦੇ ਵਿੱਚ ਕبھی ਨਹੀਂ ਆ ਰਹੀ ਸਾਰੇ ਘੜਾਂ ਦੇ ਵਿੱਚ ਹੈ ਹੈ ਉਹਨਾ ਜਿੱਥੇ ਵੀ ਕਮੀ ਕਿਤੇ ਹੈ ਜਪੀਨ ਹੈ ਸੁੱਤਾ ਕੋਈ ਕਿੰਨਾ ਜਾਗਦਾ ਕਿੰਨਾ ਆਣੇ ਕੋ ਜਣੇ ਘੜੇ ਕੋ ਜਣੇ ਸਾਰੇ ਦੇ ਭਰੇ ਹੋਇਆ ਕਿੰਨਾ ਖਾਲੀ ਕਿੰਨਾ ਕਿਆ ਨਾਲ ਕਿੰਨਾ ਭਰਿਆ ਹੋਇਆ ਬਾਕੀ ਖਾਲੀ ਹੈ ਬਾਕੀ ਜਾਵਾ ਹੈ ਕਿਹ ਗਰੀ ਮਿਹਰਬਾਨ ਸਮਰੱਥ ਆਪੇ ਹੀ ਘਾਲ ਲੱਖ ਪੌੜੀ ਚੜਾ ਕੇ ਲਿਆ ਮਿਹਰਬਾਨ ਸਮਰੱਥ ਲੈ ਆਇਆ ਕੇ ਕਿਆ ਕਹਦੇ ਘੜੇ ਚ ਪਾਣੀ ਥੋੜਾ ਹੈ ਜ਼ਿਆਦਾ ਇਹ ਲਿਆਇਆ ਉਹ ਮਿਹਰਬਾਨ ਸਮਰੱਥ ਤੇ ਤੱਕ ਉਹਦੀ ਘਾਲਣਾ ਨਾਲ ਆਇਆ ਉਹਦੇ ਤੱਕ ਆਪਣੀ ਮਦਦ ਨਾਲ ਨਹੀਂ ਆਇਆ ਆਪਣੇ ਪੈਰਾਂ ਨਾਲ ਚੱਲ ਕੇ ਆਇਆ ਇੱਥੇ ਤੱਕ ਵੀ ਪੈਰਾਂ ਬਾਜੋ ਚੱਲਣਾ ਉਹਦਾ ਜਿਨ ਮਨ ਉਠਾ ਆਪ ਤੇ ਸਦਾ ਸੁਖਾਲਿਆ ਆਪੇ ਰਚਨ ਰਚਾਏ ਆਪੇ ਹੀ ਪਾਲਿਆ ਜਿਹਨ ਮਨ ਉਠਾ ਆਪ ਜਿਹਦੇ ਮੁੱਢ ਵਿੱਚ ਆ ਬੋਲਿਆ ਨਾ ਆ ਵਰਖਾ ਕੀਤੀ ਤੇ ਸਦਾ ਸੁਖਾਲਿਆ ਉਹ ਸਦਾ ਹੀ ਸੁਖੀ ਹੋਊਗਾ ਉਹ ਤਾਂ ਅਵੇਸ਼ਾਲੇ ਸੁਖੀ ਹੋਗੇ ਪਰ ਜਿਹਨੇ ਸੁਣ ਲਿਆ ਉਹਨੂੰ ਥੋੜਾ ਜਿਹਰ ਵਾਸਤੇ ਸੁਖ ਹੋ ਗਿਆ ਜਿਹਨੇ ਮੰਨ ਲਿਆ ਉਹਨੂੰ ਥੋੜਾ ਜਿਆਦਾ ਸੁਖ ਹੋ ਗਿਆ ਹਾਂਜੀ ਆਪੇ ਹੀ ਪਾਲ ਲਿਆ ਆਪੇ ਆਪੇ ਹੀ ਪਾਲਿਆ ਰਚਣੂ ਬਿਓ ਨੇ ਆਪਰ ਵਿਸ਼ਰਣ ਨਹੀਂ ਚਾਹੀਏ ਪਾਲਣਾ ਵੀ ਕਰ ਲਿਆ ਜੀ ਸਭ ਕੁਝ ਆਪੇ ਆਪ ਬੇਅੰਤ ਅਪਾਰਿਆ ਗੁਰਪੂਰੇ ਕੀ ਟੇਕ ਨਾਨਕ ਸੰਭਾਲ ਸਭ ਕੁਝ ਆਪੇ ਆਪ ਜੋਤ ਨੂੰ ਕਹਿੰਦੇ ਨੇ ਸਭ ਆਪੇ ਆਪ ਮਾਇਆ ਦੇ ਵਿਚ ਆ ਜਿਹੜਾ ਮਾਇਆ ਦੀ ਨਹੀਂ ਹੈ ਸੱਚਖੰਡ ਦਾ ਤਰਿਆਂ ਦੇ ਵਿੱਚ ਕੋਈ ਹੈਗਾ ਵੱਡਾ ਉਹ ਤਾਂ ਲੈ ਬਤਨ ਅਜੇ ਤੂੰ ਆਖੀ ਕਿਹਦੇ ਬਕਾਉਣੇ ਕੋਣ ਇਹ ਸਭ ਕੁਝ ਆਪੇ ਆਪ ਆਪ ਬੇਅੰਤ ਅਪਾਰਿਆ ਆਪਣੀ ਤੇਰਾ ਜੋਤਿਬਿੰਦੀ ਮਰਜ਼ੀ ਬੁਰਜਬਿੰਦੀ ਮਰਜ਼ਾ ਠੀਕ ਹੈ ਇਹ ਮਨ ਮਰੇ ਨੀ ਇਹ ਜੋਬਰਦਾਰੀ ਬਿਆਨਤਾ ਹੋ ਇਹਦਾ ਆਪਣੀ ਬਿਆਨਤਾ ਹੋ ਬਿਆਨਤਾ ਅਪਾਰ ਆ ਅਪਾਰ ਕਾ ਤੂੰ ਕਹਿ ਤਾ ਅਪਾਰ ਤਾਂ ਕਹਿਦਾ ਵੀ ਬਗਤ ਅਦਾ ਜਪੇ ਤਰੇ ਜਨੂ ਦਾ ਵੀ ਕੀ ਟੇਕ ਨਾਨਕ ਸੰਭਾਲਿਆ ਗੁਰਪੂਰੇ ਦੀ ਦੇਖ ਨਾਲ ਸੰਭਾਲਿਆ ਜੇ ਗੁਰਪੂਰੇ ਦੀ ਟੇਕ ਲਾ ਲਵੇ ਨਾਂਨ ਕਹਿੰਦੇ ਫੇਰ ਸੰਭਾਲ ਲੈ ਫੇਰ ਸਮਾ ਜਾੰਦ। ਜੇ ਪੂਰਾ ਗਿਆਨ ਦੀ ਦੇਖ ਮਿਲ ਜਵੇ ਪੂਰੇ ਫਿਰ ਮਾਇਆ ਦੇ ਆਸਰੇ ਦੀ ਲੋੜ ਹੀ ਰਹਿੰਦੀ। ਮਾਇਆ ਦੇ ਆਸਰੇ ਦੀ ਲੋੜ ਇਹਨੂੰ ਉਦੋਂ ਦੇ ਆਸਰੇ ਦੀ ਉਦੋਂ ਚ ਲੋੜ ਹੈ ਜਦ ਨਾਲ ਪੂਰਾ ਗਿਆਨ ਵਿਹਦੀ। ਅੱਛਾ ਗਿਆਨ ਦੀ ਕਮੀ। ਠੀਕ ਹੈ ਜੀ।